ਸ਼ਲੋਕ ਮਹੱਲਾ ਪਹਿਲਾ ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ ਤੁਧ ਅੱਗੇ ਤੁਧੈ ਸਲਾਹੀ ਮੈਂ ਆਂਦੇ ਨਉ ਸੁਜਾਖਾਂ ਸ਼੍ਰੀਖੇ ਖੁਦਾ ਬੁਜਲੇ ਬੁਤਲ ਬੋਲ ਅਸਲ ਕਿ ਉਹਦੇ ਵੱਲੋਂ ਇਸ਼ਾਰਾ ਹੈ ਗੁਰਬਾਣੀ ਨਹੀਂ ਵਰਦੀ ਹੈ ਸ਼੍ਰੀਕਾ ਤੇਰਾ ਕੋਈ ਕਹਿੰਦੇ ਹੋਰ ਕੋਈ ਸ਼ਰੀਕ ਤੇਰਾ ਹੋਵੇ ਕਬੜ ਕਬ ਤੇਰੇ ਅੱਗੇ ਜੂਬ ਮੈਂ ਕਦੇ ਮਾਂ ਝੂਠ ਨਹੀਂ ਬੋਲਦਾ ਤੇਰੇ ਅੱਗੇ ਨਹੀਂ ਮੈਂ ਝੂਠ ਬੋਲ ਸਕਦਾ ਤੇਰੇ ਅੱਗੇ ਮੈਂ ਧੋਸ ਨਹੀਂ ਬੋਲਦਾ ਸੁਭਾਸ਼ ਕਹਿੰਦਾ ਵੀ ਤੇਰੇ ਵਰਗਾ ਕੋਈ ਹੋਰ ਵੀ ਹੈ ਤੇਰੇ ਜਿੱਦੀ ਸ਼ਕਤੀ ਦਾ ਮਾਲਕ ਤੇਰੇ ਮੁਕਾਬਲੇ ਦਾ ਕੋਈ ਸ਼ਰੀਕ ਤੇਰਾ ਹੈ ਹੋਰ ਪਰ ਹੈ ਨਹੀਂ ਕਿ ਉਹ ਬੈਨਾ ਕਹਿਣ ਦਾ ਬਦਲੋ ਸ਼ਰੀਕੇ ਫੁਦਾ ਕੋਈ ਹੈ ਹੀ ਨਹੀਂ ਤਰੀਕੇ ਨਾਲ ਉਹਨਾਂ ਦੀ ਗੱਲ ਦੀ ਕਾਟ ਕਰਤੀ ਕਾਠ ਵੀ ਕਰਤੀਆਂ ਨੂੰ ਮਹਿਸੂਸ ਹੋਦੀ ਹੁੰਦੀ ਹੁੰਦਾ ਹਾਂ ਹਾਂਜੀ ਤੁਦ ਅੱਗਾ ਤੁਦ ਸਲਾਹੀ ਮੈਂ ਅੰਦੇ ਨਾਂ ਸੁਜਾਖਾ ਆ ਤੇ ਇਸ ਕਰਕੇ ਮੈਂ ਤੇਰੇ ਅੰਗੇ ਤੇਰੀਓਸੇ ਸੁਜਾਖਾ ਲਈ ਨਾ ਮੈਂ ਤਾਂ ਨਾ ਪਰ ਤੇਰਾ ਜਿਹੜਾ ਨਾਂ ਹੈ ਨਾ ਉਹਦੀ ਵਜ੍ਹਾ ਨਾਲ ਤੇ ਸੁਜਾਖਾ ਉਹਦੇ ਵਜ੍ਹਾ ਨਾਲ ਦ੍ਰਿਸ਼ਟੀ ਵੀ ਤੀਸਰਾ ਤੀਸਰਾ ਦਿੱਤਾ ਰਹਿਣਾ ਜਿਹੜਾ ਉਹਦੀ ਵਜ੍ਹਾ ਨਾਲ ਤੇ ਸੁਜਾਖਾ ਉਹ ਜਿਹੜਾ ਲੱਗਿਆ ਨੇਤਰੀ ਨੇਤਰਾਂ ਨੂੰ ਸੂਤਕ ਉਹ ਸੂਤਕ ਲੈ ਗਿਆ ਲਾਤਾ ਦਾ ਨਾਮ ਲੈ ਲਾਤਾ ਕੱਢਣਾ ਦਾ ਸੂਤਕ ਲੈ ਗਿਆ ਦੇਤਰਾਂ ਦਾ ਅੱਖਾਂ ਦਾ ਸੂਤਕ ਲੈ ਗਿਆ ਔਰ ਮੈਂ ਸਜਾਖਾ ਹੋ ਗਿਆ ਨਾਮ ਦੀ ਵਜ੍ਹਾ ਨਾਲ ਸਜਖਾ ਮੈਂ ਤਾਂ ਅੰਧੇ ਹੀ ਸੀ ਇਹਨਾਂ ਨੂੰ ਸਜਾਖਾ ਫਿਰ ਇਹਨਾਂ ਨੇ ਮੇ ਨੂੰ ਅੱਖਾਂ ਦੇਤੀ ਭੈਣ ਠੀਕ ਹੈ ਨਾਂਵ ਕਰਕੇ ਸਜਾਖਾ ਹੋ ਗਿਆ ਪਹਿਲਾਂ ਅੰਨਾ ਏ ਆਰ ਸਰੀਆ ਬਕਰਦਾ ਮੇਰੇ ਅੰ내 ਦਾ ਨੋ ਸੁਜਾਖਾ ਲੇ ਕੇ ਮੈਂ ਉਹ ਜੂ ਹਲ ਕਹਿਣ ਦਾ ਦੇ ਤਰੀਕਾ ਹਾਂਜੀ ਐਕਸਪਲੇਨ ਕਰ ਦੇ ਤਰੀਕਾ ਹਾਂ ਦੋ ਅਰਥ ਹੋ ਸਕਦੇ ਆ ਕਿ ਮੇਰਾ ਨਾਂ ਸੁਜਾਖਾ ਜਾਂ ਮੈਂ ਤੇਰਾ ਨਾਂ ਸੁਣ ਕੇ ਸੁਜਾਖਾ ਹੋ ਗਿਆ ਠੀਕ ਹੈ ਜੇਤਾ ਆਖਣ ਸਾਹੀ ਸ਼ਬਦੀ ਆਖਿਆ ਭਾਈ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਜਿਤਾ ਆਖਣ ਜਿੰਨਾ ਵੀ ਆਖਿਆ ਗਿਆ ਹੈ ਆਖਿਆ ਹੈ ਸਭ ਤਨ ਇਹਦੇ ਹੁੰਦਾ ਨਹੀਂ ਭਾਈ ਛਪਦੀ ਤੁਹਾਡਾ ਉਪਦੇਸ਼ ਹੈ ਉਹ ਤੁਹਾਡਾ ਆਖੇ ਉਪਦੇਸ਼ ਰੂਪ ਹੀ ਪਾਖਿਆ ਪਾਓ ਆਖਿਆ ਪਾਇਸ ਭਾਈ ਕੋਈ ਕਿਸੇ ਨਾਲ ਬੈਰ ਵਿਰੋਧ ਕੇ ਠੀਕ ਆ ਗਿਆ ਈਰਖਾ ਰੱਖੇ ਠੀਕ ਆ ਜੋ ਬੋਲੇ ਆਖਿਆ ਭਾਵਨਾ ਨਾ ਪ੍ਰੇਮ ਭਾਵਨਾ ਨੂੰ ਸੁਪਾਵਨਾ ਨਾ ਆਖਿਆ ਗਿਆ ਬੁੱਧ ਭਾਵਨਾ ਨੂੰ ਦੋਦੀ ਆਖਿਆ ਸੁਭਾਵਨਾ ਨਾ ਆਖਿਆ ਗਿਆ ਉਹਨਾਂ ਦਾ ਜੇ ਧੋਖਾ ਹੈ ਨਾ ਸ਼੍ਰੀ ਕੁਵਾਰੇ ਖੁਦਾਵਾਰੇ ਉਹ ਉਹ ਸ਼ਰੀਰ ਹੈ ਨਹੀਂ ਕੋਈ ਉਹਨੂੰ ਦੱਸਿਆ ਗਿਆ ਵੀ ਨਹੀਂ ਹੈ ਭਾਈ ਸ਼ਰੀਰ ਹੈ ਮੈਂ ਭਲੇਖੇ ਜਨਨ ਰਹੋ ਪਾਵਨਾ ਮੁੱਢੀ ਦੀ ਸੀ ਉਹਨਾਂ ਦੀ ਵਿਸ਼ੇਸ਼ੀ ਕਰਕੇ ਸੱਜੀਆਂ ਗੱਲ ਕਹੀ ਉਹਨਾਂ ਨੂੰ ਸਮਝਾਉਣ خاطر ਕੀਤੀ ਜੋ ਬੇਲੂ ਅੱਖਾਂ ਆਖਣ ਇੱਥੇ ਸ਼ਬਦੀ ਨਹੀਂ ਭਾਵ ਹੈ ਕਿ ਜੋ ਸ਼ਬਦ ਮੈਨੂੰ ਬਿਨਾ ਕੰਨਾਂ ਤੋਂ ਸੁਣਿਆ ਉਹਦੋਂ ਮੈਂ ਅੱਗੇ ਦੱਸਿਆ ਹਾਂ ਆਹ ਸ਼ਬਦੇ ਦੱਸਿਆ ਮੈਂ ਤਾਂ ਸੁਣ ਕੇ ਹੀ ਦੱਸਿਆ ਉਹ ਦੀ ਪਾਸ਼ਾ ਜਿਹੜੀ ਹੈ ਉਹ ਮੰਦ ਭਾਗੀ ਨਹੀਂ ਹੈ ਉਹ ਚੜ੍ਹਦੀ ਕਲਾ ਵਾਸਤੇ ਹੀ ਕਲਿਆਣ ਵਾਸਤੇ ਆ ਸਭ ਦੇ ਪਾਸ਼ਾ ਉਹ ਕਿਸੇ ਦੇ ਸੱਟ ਬਾਰਨ ਵਾਸਤੇ ਨਹੀਂ ਹੈ ਬੇਇੱਜ਼ਤੀ ਕਰਨ ਵਾਸਤੇ ਨਹੀਂ ਹੈ ਕਿਸੇ ਨੂੰ ਉਲਟੀ ਵਾਸਤੇ ਨਹੀਂ ਹੈ ਉਹ ਤਾਂ ਸਭਾ ਕਲਾ ਕਰਨ ਵਾਸਤੇ ਹੈ ਠੀਕ ਹੈ ਜੀ ਹੋਰ ਗਿਆਨ ਦੇਣ ਵਾਸਤੇ ਹੈ ਹੋਰ ਤੁਹਾਨੂੰ ਸੁਖ ਮਿਲੂ ਉਹਦੇ ਲੋਰ ਹੋਰ ਪਦਾਰਥ ਮਿਲਣਗੇ ਉਹਦੇ ਲੋਰ ਹੈਗੇ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਸਾਰੇ ਗਾਣਾ बस ਆਖਣ ਨੂੰ ਕੀ ਰਹਿ ਗਿਆ ਹੁਣ ਬਹੁਤਾ ਇਹੀ ਰਹਿ ਗਿਆ ਸਭ ਤੇਰੀ ਵਡਿਆਈ ਹੈ ਹੋਰ ਕੋਈ ਸ੍ਰੀ ਕਹੇ ਜੀ ਸਭ ਤੇਰੀ ਹੀ ਵਡਿਆਈ ਕੀਤੀ ਹੈ ਕਿਸੇ ਆਦੂ ਦੀ ਵਡਿਆਈ ਨਹੀਂ ਕੀਤੀ ਠੀਕ ਹੈ ਜੀ ਉੱਤੇ ਉਹਨਾਂ ਨੇ ਆਦੂ ਦੀ ਵਡਿਆਈ ਕਰਤੀ ਸੀ ਨਾ ਬਹੁਤ ਦੀ ਸ੍ਰੀ ਖੁਦਾ ਖੁਦਾ ਦੀ ਵਡਿਆਈ ਹੈ ਸਾਰੀ ਹੋਈ ਠੀਕ ਹੈ ਪਹਿਲਾਂ ਵੀ ਆ ਚੁੱਕਿਆ ਕਿ ਵਡਿਆਈ ਜੀ ਕਰਨੀ ਹੈ ਤਾਂ ਕਰ ਤੇਰੀ ਕਰਨੀ ਹੈ ਕਿਰਤ ਦੀ ਨਹੀਂ ਕਰਨੀ ਹਾਂ ਜੀ ਠੀਕ ਹੈ ਜੀ ਮਹੱਲਾ ਪਹਿਲਾ ਜਾ ਨਾ ਸਿਆ ਕਿਆ ਚਾਕਰੀ ਜਾ ਜੰਮੈ ਕਿਆ ਕਾਰ ਸਬ ਕਾਰਣ ਕਰਤਾ ਕਰੇ ਦੇਖੇ ਵਾਰੂ ਵਾਰ ਇਹਨਾਂ ਨੇ ਪਾਠ ਉਗੜ ਕੇ ਰੱਖਤਾ ਹੈ ਅੱਛਾ ਜੀ ਇੱਕ ਤਾਂ ਲਾਤੀ ਜਾਂਦੇ ਲਾਈ ਹੈ ਜੀ ਹਾਂ ਆ ਦੋਹੇ ਜਗ੍ਹਾ ਇਹ ਗਲਤ ਹੈ ਇਹ ਜਾ ਹੈ ਜਦ ਜਿੰਨਾ ਬਖਰਾ ਕਰਤਾ ਸਿਆ ਬਖਰਾ ਕਰਤਾ ਅੱਛਾ ਜੀ ਇਹ ਨਸਿਆ ਲਾ ਫਿਆ ਨਸਿਆ ਜਾ ਨਸ ਗਿਆ ਸੱਚ ਤੂੰ ਜਾਂ ਗੁਰੂ ਤੋਂ ਬੇਮੁਖ ਹੋ ਗਏ ਹੱਸ ਗਏ ਆਪਾਂ ਕਹਿੰਦੇ ਇਹ ਹੋ ਗਿਆ ਨਸ ਗਿਆ ਠੀਕ ਜਿੰਨਾ ਜਰ ਭਟਕਦਾ ਰਿਹਾ ਗੁਰੂ ਫਿਰਦਾ ਰਿਹਾ ਮਾਇਆ ਦੇ ਪਿੱਛੇ ਤਾਂ ਚੱਕਰੀ ਕਿੱਥੋਂ ਕਰਨੀ ਸੀ ਉਹ ਤਾਂ ਮਾਇਆ ਦੇ ਪਿੱਛੇ ਦੌੜਦਾ ਫਿਰਦਾ ਉਹ ਆਪਣੇ ਪਾਣੀ ਚੱਕ ਨਹੀਂਦੀ ਉਸਦੀ ਚੱਕਣ ਲੱਗੇ ਚੱਕਦੀ ਜੇ ਚੱਲੇ ਖਸਮੇ ਪਾਏ ਖਸਮੇ ਪਾਏ ਤਾਂ ਚਲਿਆ ਨਹੀਂ ਚੱਕਰੀ ਕਿੱਥੋਂ ਕਰ ਸਕਦਾ ਪਾਣੀ ਤਾਂ ਆਪਣੇ ਕੋ ਜਰ ਦੇਖੋ ਦੋਏ ਗਲਤੀਆਂ ਉਹਨਾਂ ਦੀਆਂ ਸਾਫ ਜਾਹਰ ਹੋ ਵੀ ਗਲਤੀਆਂ ਦੀ ਵਿੱਤੀ ਵਾਲੀ ਵੀ ਗਲਤੀ ਹੈ ਦੱਸਿਆ ਵੀ ਲਫ਼ਜ਼ ਠੀਕ ਹੈ ਠੀਕ ਹੈ ਜੀ ਇਹ ਹੋਰ ਜਗ੍ਹਾ ਵੀ ਆਉਂਦਾ ਜੀ ਦੁੱਖ ਦਰਦ ਭਰਮ ਭੌ ਨਸਿਆ ਹਾਂ ਜੀ ਹਾਂ ਅਸਕੇ ਭੱਜ ਗਿਆ ਠੀਕ ਹੈ ਜੀ ਆਪਾਂ ਕਹਿੰਦੇ ਸੱਚ ਤੋਂ ਭੱਜ ਗਿਆ ਸਿਆ ਕਿਤੇ ਨਹੀਂ ਆਉਂਦਾ ਸਿਆ ਇਹਨਾਂ ਨੇ ਸਿਰਫ ਇੱਥੇ ਲਿਖਿਆ ਉਹ ਵੀ ਕਿਉਂਕਿ ਨੰਨਾ ਟੁੱਟ ਗਿਆ ਤਾਂ ਆਇਆ ਜੀ ਹਾਂ ਪ੍ਰੋਫੈਸਰ ਸਰਸ਼ੀ ਨੇ ਨਾ ਸਿਆ ਦਾ ਕਿਹਾ ਨਹੀਂ ਸੀ ਹੋਂਦ ਵਿੱਚ ਨਹੀਂ ਸੀ ਆਇਆ ਜਦੋਂ ਜੀ ਹੋਂਦ ਵਿੱਚ ਨਹੀਂ ਸੀ ਆਇਆ ਤਦੋਂ ਇਹ ਕਿਹੜੀ ਕਮਾਈ ਕਰ ਸਕਦਾ ਸੀ ਉਹਨ जदो ਜੰਮ ਪਏ ਤਾਂ भी ਕਿਹੜੀ ਕਿਰਤ ਕੀਤੀ ਜਦੋਂ ਇਹ ਫਟਕਦਾ ਸੀ ਤੁਰਦਾ ਫਿਰਦਾ ਸੀ ਪਾਣੀ ਸੀ ਲਹਿਰਾਂ ਉੱڑਦੀਆਂ ਸੀ ਹਾਂ ਚਾਤਾ ਆਪਣੇ ਹੁਕਮ ਚੱਲਦਾ ਤਾਂ ਲਹਿਰਾਂ ਉੱڑਦੀਆਂ ਸੀ ਹੁਣ ਜੰਮ ਗਿਆ ਜਿਵਾ ਘਰ ਹੋ ਗਿਆ ਗੁਰਹਿਵਾ ਘਰ ਉੜਦੇ ਨਹੀਂ ਘਾਰ ਕਨੇ ਘਰ ਹੁਣ ਕਰਾਇਆ ਕਰੂਗਾ ਉਹਨਾਂ سرکار ਕਾਰ نہیں ہے کلو پیسہ بلایا بولوں گا چلایا جلوں جو تو چلایا تے میں چلنا سو بھی اپنی کار کوئی نہیں ہے دیو ہاں مورک کارے لایا لاؤں گا او تاں بول تاں آلا آلا بولا بنوں گا تاں چاکر چاکری لگوں अपने ਫੁੱਲ बंद, ਬੰਦ ਆਪਣੀ ਬੰਦ सब कारण करता करे ਕਰੇ ਦੇਖੇ ਵਾਰੋ-ਵਾਰ ਹਾਂ ਇਹ ਤਾਂ वार के ਵਾਰ ਕੇ ਦੇਖਦਾ ਹੀ ਰਹਿੰਦਾ ਹੈ ਇਹ ਤਾਂ ਉਹ ਤੇ ਕੁਰਬਾਨ ਕਰਕੇ ਨਾ ਮਾਦਾ ਆਪਣਾ ਬੁੱਧੀ ਇਹ ਤਾਂ ਦੇਖਦੀ ਹੋ ਰਹੀ ਜੀ ਵੀ ਕਰਤਾ ਹੁਣ ਕੀ ਕਰਦਾ ਹੈ ਕੀ ਕੁਰਮਖਾਨਾ ਪਲਾਨ ਕੋਈ ਨਹੀਂ ਹੁੰਦਾ ਕਰਤੇ ਦਾ ਪਲਾਨ ਹੁੰਦਾ ਜਿਹੜਾ ਦੇਖਦੇ ਹੀ ਰਹਿੰਦੇ ਨੇ ਦੇਖ ਬਰਦਾਰੀਆਂ ਰੰਗ ਕਰਤਾਲ ਤੇ ਕਰਤਾਰ ਦੇ ਰੱਬ ਦੇਖਦੇ ਰਹਿੰਦੇ ਨੇ ਠੀਕ ਹੈ ਜੀ ਜੇ ਚੁੱਪੈ ਜੇ ਮੰਗੀਐ ਦਾਤ ਕਰੇ ਦਾਤਾਰ ਇਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ ਜੇ ਚੁੱਪੈ ਜੇ ਬੋਲ ਚੁੱਪਾ ਕੇ ਮੇਰੇ ਕੋਈ ਦੁਨੀਆ ਹੀ ਨਹੀਂ ਅਫੇਰ ਦੁਜੇ ਚੁੱਪ ਕਰਕੇ ਬੁਝੇ ਉਹ ਉਹ ਕੋਣ ਨੂੰ ਮਾਰ ਜੋ ਪੈ ਕਿਤਨੀ ਛਾ ਹੁੰਦੀ ਛਾਦੀ ਮਾਰ ਕਰਕੇ ਇੱਛਾ ਖਤਮ ਫਿਰ ਜਿੱਤ ਕੀ ਇੱਛਾ ਪੂਰੀ ਹੋਣ ਦੀ ਡੋੜ ਰਹਿ ਜਾਂਦੀ ਪੂਰਨ ਹੋਏ ਚਿੱਤ ਕੀ ਇੱਛਾ ਮਨੋਂ ਚੁੱਪ ਕਰਾ ਕੇ ਬੰਦੀਏ ਫਿਰ ਕੀ ਮੰਗੀਏ ਰੱਬ ਕਹਿੰਦਾ ਨਾਨਕ ਮੰਗੇ ਦਰਸਨਾ ਦਰਗਹ ਕਹਿੰਦਾ ਦਰਸਦਾਰ ਉਹ ਹੁੰਦੀ ਬਸ ਇਹ ਸਤ ਸੰਤੋਖ ਹੋਵੇ ਅਰਦਾਸ ਹੋ ਰਹੀ ਗੱਲ ਹੋਣਾ ਜੀ ਹਾਂ ਸਤ ਸੰਤੋਖ ਤੋਂ ਬਾਅਦ ਦੀ ਮੰਗ ਹੈ ਠੀਕ ਹੈ ਦਾਤ ਕਰੇ ਦਾਤਾਰ ਕਰੇ ਦਾਤਾਰ ਫਿਰ ਦਾਤ ਮਿਲਦੀ ਹੈ ਦਾਤਾਰ ਕੋਲੋਂ ਇੱਕ ਦਾਤਾ ਸਭ ਮੰਗਦੇ ਦਾਤਾ ਤਾਂ ਹੀ ਹੈ ਸਭ ਮੁਕਤੇ ਹੀ ਨੇ ਉਹ ਚਾਹ ਮਾਇਆ ਗੁੱਥਣ ਵਾਲੇ ਨੇ ਕੋਈ ਹੁਣ ਨਹੀਂ ਨੇ ਠੀਕ ਹੈ ਜੀ ਫਿਰ ਦੇਖੇ ਆਕਾਰ ਫਿਰ ਦੇਖੇ ਆਕਾਰ ਉਹ ਜਿਹੜੇ ਦੁਏ ਮੁਕਤੇ ਨੇ ਉਹਦਾ ਦੁਨੀਆਂ ਦੇ ਵਿੱਚ ਕੀ ਮਕਣਾ ਆਕਾਰ ਬਾਹਰ ਨੂੰ ਦੇਖਦੇ ਨੇ ਭਾਈ ਕੀ ਚੀਜ਼ ਬਗੜੀ ਜਿਹੜਾ ਨਾ ਪੱਕਣਾ ਹੋ ਰੋਗ ਦਾ ਆਰਦਾਸ਼ ਵੀ ਕਰ ਲੈਂਦਾ ਉਹਦਾ ਦਲਣਾ ਜੋ ਬੰਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਗਾ ਠੀਕ ਹੈ ਪਰ ਇਹ ਦੇਖੇ ਆਕਾਰ ਵਿਰਾਟ ਰੂਪ ਦੀ ਗੱਲ ਹੈ ਜੀ ਨਹੀਂ ਆਪਣਾ ਆਕਾਰ ਹੈ ਆਪਣਾ ਆਪਾਂ ਹੀ ਦੇਖਣੇ ਜੰਬਿਆ ਹੋਇਆ ਨਾਨਕ ਗੁਰ ਸਰ ਤੋਂ ਰੁਖ ਜਿਹੜਾ ਅੰਦਰੋਂ ਤੁਰਤੀ ਵਾਲੀ ਪ੍ਰਗਟ ਹੋਈ ਹੈ ਸ਼ਬਦ ਗੁਰੂ ਪ੍ਰਗਟ ਉਹ ਹੀ ਦੇਖਣਾ ਬਰਾ ਦੂਕੀ ਦੇਖਦੇ ਆਪਣਾ ਆਪਾ ਦੇਖ ਗਿਆ ਹਾਂਜੀ ਹਾਂ ਆਪਣਾ ਅੰਦਰੋਂ ਪੈਦਾ ਹੋਇਆ ਦੇਖ ਗਿਆ ਠੀਕ ਹੈ ਕਬੀਰ ਜਾ ਕੇ ਉਹ ਪਾਇਆ ਸੋਈ ਠੌਰ ਹਾਂਜੀ ਠੀਕ ਕੋਈ ਤੂੰ ਪਿਆ ਜਾ ਕੋ ਕਹਿੰਦਾ ਇਹਨੇ ਆਪਣਾ ਆਕਾਰ ਦੇਖ ਲਿਆ ਹਾਂ ਆਪਣਾ ਆਕਾਰ ਦੇਖ ਲਿਆ ਕਿੱਕ ਦਾ ਪਤਾ ਲੱਗਿਆ ਕਿ ਕੀ ਹੁੰਦਾ ਹਾਂਜੀ नानक ਏਵੇਂ ਜਾਣੀ ਐ ਜੀਵੈ ਦੇਵਨ ਹਾਰ ਅਸੀਂ ਤਾਂ ਇਹਦੇ ਜਾਣੀ है ਜਾਣੀ ਐ ਅਸੀਂ ਤਾਂ ਇਹ ਗੱਲ ਜਾਣ ਲਈ ਐ ਜਾਣ ਲਈ ਹੈ ਕਿ ਜਿਹੜਾ ਦੇਵਨ ਆ ਰਿਹਾ ਸਦਾ ਹੀ ਚੜ੍ਹਦਾ ਰਹਿੰਦਾ ਪੱਕੀ ਜਿਹੜੇ ਦਾਤੇ ਨੇ ਮਰ ਜਾਂਦੇ ਨੇ ਉਹ ਦਾਤੇ ਦੀ ਹੈ ਹੋਰ ਦਾਤੇ ਸਾਰੇ ਹੀ ਉਹ ਗੱਲ ਦਾ ਜਵਾਬ ਇੱਥੇ ਆ ਦੇ ਤੀ ਜੀ ਤੋੜੀ ਨਾਏ ਮੰਨਿਆ ਸੁਰਤ ਉਪਜੈ ਨਾਮੇ ਮਤ ਹੋਈ ਨਾਏ ਮੰਨਿਆ ਗੁਣ ਉਚਰੇ ਨਾਮੇ ਸੁਖ ਸੋਈ ਪਰ ਮੰਨਣ ਨਾਲ ਹੁਕਮ ਮੰਨਣ ਨਾਲ ਸੁਰਤ ਉਪਜੈ ਉਹ ਸਰ ਪੈਦਾ ਹੁੰਦੀ ਹੈ ਰਾਮ ਰਬਤ ਮੱਤ ਪਰਗਤੀ ਆਈ ਆਵਤਾਰ ਸੁਰਤ ਤੋਂ ਪੈਦਾ ਹੁੰਦੀ ਹੈ ਉਹ ਜਾਗਦਾ ਸੁਰਤ ਆਉਂਦੀ ਜਾ ਕੇ ਸੁਣਦਾ ਹੈ ਸਮਝਦਾ ਮੱਤ ਆਉਂਦੀ ਹੈ ਸੁਰਤ ਮਰੀ ਹੋਈ ਹੁੰਦੀ ਹੈ ਕੋਈ ਸੁਰਤ ਬਾਦ ਹੰਕਾਰ ਜਿਨਾ ਚਿਰ ਹੰਕਾਰ ਹੈ ਸੁਰਤ ਨਹੀਂ ਜੀਉਂਦੀ ਮਰੀ ਹੁੰਦੀ ਹੈ ਕੋਈ ਸੁਰਤ ਬਾਦ ਹੰਕਾਰ ਮੱਤ ਗੁਰਮਤ ਹੈ ਜੀ ਹੈ ਨਾਮੇ ਮੱਤ ਹੋਈ ਹਾਂ ਹਾਂ ਹੈ ਬਾਤ ਗੁਰਮਤ ਹੈ ਠੀਕ ਹੈ ਜੀ ਨਾਮ ਮੰਨਿਆ ਗੁਣ ਉੱਚਰੈ ਨਾਮੈ ਸੁਖੀ ਸੋਈ ਬੜੀਏ ਤਾਂ ਗਿਆਨ ਦਾ ਵਿਚਾਰਨ ਕਰਦਾ ਜਿਵੇਂ ਰੱਬ ਬੋਲਦਾ ਗਿਆ ਵਰਗੁਦਾ ਗਿਆਨ ਦੱਸਦਾ ਗੁਣ ਉੱਚਰੈ ਬੜੀਏ ਗੁਣ ਉੱਚਰੈ ਨਾਮੈ ਸੁਖੀ ਸੋਈ ਆਸਨਰ ਸੁਭੀਰ ਹੈ ਠੀਕ ਜੀ ਨਾਮ ਮੰਨਿਆ ਭ੍ਰਮ ਕੱਟੀ ਐ ਫਿਰ ਦੁੱਖ ਨਾ ਹੋਈ ਇਹ ਜਵਾ ਨਾਮ ਨੂੰ ਬੰਦੇ ਰਹੀਏ ਭ੍ਰਮ ਕਟਿਆ ਜਾਂਦਾ ਸਾਰਾ ਕੋਈ ਡੋਖਾ ਰਹਿਦਾ ਹੀ ਨਹੀਂ ਠੀਕ ਹੈ ਜੀ ਨਾਏ ਮੰਨਿਏ ਸਲਾਹੀਆਂ ਪਾਪਾ ਮਤ ਥੋਈ ਉਹ ਨਾਲ ਬੰਦੀਆਂ ਸਲਾਹੀਏ ਤੇ ਕਿਹਾ ਬੰਦੀਏ ਉਹ ਆਖਰੀ ਗੱਲ ਐ ਸਲਾਹ ਕਰੀਏ ਕੋਈ ਬਾਣੀ ਉਤਰੀਏ ਸਲਾਹੀਏ ਪਾਪਾ ਮਤ ਥੋਈ ਪਾਪਾ ਦੀ ਜਿਹੜੀ ਮਰਤ ਹੈ ਸੰਸਾਰ ਦੇ ਵਿੱਚ ਖਾਲੀ ਦੇ ਪਾਪਾ ਨੇ ਮਰਤ ਫੜਾਈਏ ਪਾਪ ਨਹੀਂ ਮਟਕਾ ਜੀ ਤੁਸੀਂ ਝੂਠ ਦੀ ਗੱਲ ਕਹੋਦੀ ਝੂਠ ਬੋਲਿਆ ਹੋਇਆ ਹੁੰਦਾ ਜੈ ਗਿਆਨ ਕਰਮ ਹੈ ਜੈ ਝੂਠ ਤੇ ਪਾਪ ਉਹ ਜਿਹੜੇ ਝੂਠ ਬੋਲਦੇ ਨੇ ਨਾ ਜੇ ਦਰਸ਼ਨ ਹੋ ਗਏ ਉਹ ਫੇਰਿਆ ਗਿਆ ਦੇ ਉਹ ਫੇਰਿਆ ਗਿਆ ਉਹ ਸਭ ਝੂਠ ਆ ਪਾਪ ਆ ਉਹ ਇਹਨੂੰ ਧੋ ਦਿੰਦਾ ਲੋਕਾਂ ਦੇ ਦਿਮਾਗ ਧੋ ਦਿੰਦਾ ਲੋਕਾਂ ਦੇ ਹਿਰਦੇ ਜੋ ਉਹਨੂੰ ਦਾ ਬ੍ਰੇਨ ਵਾਸ਼ ਕਰ ਦਿੰਦਾ ਸੱਚ ਦੱਸ ਕੇ ਸਮਝਾ ਕੇ ਠੀਕ ਹੈ ਜੀ ਨਾਨਕ ਪੂਰੇ ਗੁਰ ਤੇ ਨੋਂ ਮੰਨੀਆਂ जिन्न ਦੇਵੇ ਸੋਈ ਪੂਰਾ ज्ञान जिदे को होवे तां नो बुझदा कोई ਪੂਰੇ ज्ञान ते बिना पूरी तसल्ली कराए बिना न ओनु बुझदाली होई बाड़े पूरा ज्ञान होवे पूरे गुरका उपदेश होवे जे किसे कोण आ कोण पूरे दा पूरा आ जवे शब्द विच देखो विदेशा गुरबानी है ओ सारेयां कोल तुजे नी है ज्ञान दी पूरा विच पूरा मखड़ली काढ सके ਪੂਰੇ ਘਰ ਤੇ ਪੂਰੇ ਮੱਖਣ ਤੇ ਕੁਰਬਾਨੀ ਦਾ ਪੂਰਾ ਮੱਖਣ ਕਰ ਲੀਏ ਜੇ ਇਹਦੇ ਨਾਲ ਜਿਹੜਾ ਤਸੱਲੀ ਹੋ ਜਾਂਦੀ ਹੈ ਸਾਰੀ ਦੀ ਫੇਰ ਬੰਦਦੇ ਨਾ ਨਾ ਬਰੂ ਇਹਨਾਂ ਦੇ ਵਸ ਹੋਈ ਜਦ ਨਾਲ ਕਹਿੰਦੇ ਜੇ ਕੁਰਬਾਨੀ ਜਦ ਨਾਲ ਦਿੱਤਾ ਹੋਇਆ ਉੱਥੇ ਆਇਆ ਹੋਇਆ ਗਿਆਨ ਆਦੀ ਦਾ ਬਣਾ ਹੈ ਗਿਆਨ ਦੀ ਸਾਰਿਆਂ ਨੂੰ ਜਿੱਦੇ ਵੀ ਦੇ ਪਰਮੇਸ਼ਰ ਨੇ ਬਣੀ ਦਿੱਤੀ ਹੈ ਉਸ ਦੀ ਹੋਈ ਹੈ ਠੀਕ ਹੈ ਕਹਿਣ ਦਾ ਪਾਵ ਹੈ ਪੂਰੇ ਗੁਰ ਨੂੰ ਉਤਰਦੀ ਹੈ ਉਹਦੇ ਜੇ ਆਪਾਂ ਸਮਝ ਕੇ ਮੰਨ ਸਭ ਬਸਲੇ ਹੱਲ ਹੋ ਜਾਂਦੇ ਆਵਸਥਾ ਜਿਹੜੀ ਆ ਰਹੀ ਹੈ ਅਵਸਥਾ ਤਾਂ ਹੁੰਦੀ ਠੀਕ ਹੈ ਜੀ ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ